शलोक मोहल्ला तीजा योगी होवा जगी भवा करि कर पिखिया लेओ दरगा लेखा मांगी किस किस उत्तर देओ जो भी नु मंदे ने यानी जोकी मैं ओ जग विच जगी जग विच भवा को गुजार रहा सारे फिर तोर खैर मांगदा पिखिया मांगदा कर कर पिखिया ਲੇਓ ਘਰ ਘਰ ਤੋਂ ਪਿਖ ਲੈੰਦਾ ਫਿਰਾਂ ਜੇ ਦਰਗਾਹ लेखा ਮੰਗੀ ਐ ਜੇ ਦਰਗਾਹ ਲੇਖਾ ਮੰਗਿਆ ਵੀ ਭਾਈ ਤੇ ਲੈ ਕੇ ਖਾਦਾ ਉਹਨਾਂ ਨੂੰ ਦਿੱਤਾ ਕੀ ਇਹ ਆਏ ਜ਼ਰੂਰ ਤੇ ਅਸੀਂ ਅਨਪਾਣੀ ਦਿੰਦੇ ਰਹਿਆ ਛਕਾਉਂਦੇ ਰਹਿਆ ਇਹ ਦੇਖ ਕੇ ਸਾਧੂ ਐ ਅਸੀਂ ਤਾਂ ਇਹਨਾਂ ਦੀ ਇੱਜ਼ਤ ਕੀਤੀ ਪਰ ਸਾਨੂੰ ਲਾਹਾ ਕੋਈ ਨਹੀਂ ਮਿਲਿਆ ਕਿਦਾ ਮੈਂ ਜਵਾਬ ਦਊਂਗਾ ਇਹ ਕਣਾ ਜੋਗੀ ਦੇ ਭੇਗ ਤਾਲਨ ਕਰਨਾ ਸਾਨੂੰ ਮਨਜ਼ੂਰ ਨਹੀਂ ਉਤਰ ਦੇਣਾ ਪਊਗਾ ਇਹ ਨਹੀਂ ਅਸੀਂ ਕੰਮ ਕਰਨਾ ਹਾਂਜੀ ਛੰਗ ਵਰਜ ਦਿੱਤਾ ਤੁਸੀਂ ਜੀ ਸਿੱਖਾਂ ਨੂੰ ਵਰਜ ਦਿੱਤਾ ਠੀਕ ਹੈ ਸਿੱਖਾਂ ਫਿਰ ਤਾਂ ਬੁੱਧ ਮਤ ਦੋਹਾਂ ਪਰ ਇਹ ਤਾਂ ਹਮਲਾ ਹੋ ਗਿਆ ਹੈ ਹੋ ਗਿਆ ਹਮਲਾ ਸੇਵਾ ਵਾਲੇ ਨੇ ਤਾਂ ਨਹੀਂ ਹੋਇਆ ਹਾਂਜੀ ਇਹਨਾਂ ਤਾਂ ਵੀ ਹੋ ਗਿਆ ਜੀ ਅਸ਼ਵੀਲਾ ਨਾਉਂਦੇ ਫਿਰਦੇ ਨੇ ਇਹਨਾਂ ਤਾਂ ਨਹੀਂ ਹੋਇਆ ਗੁਰਦੁਆਰੇ ਬਣਾਉਂਦੇ ਨੇ ਇਹਨਾਂ ਤਾਂ ਨਹੀਂ ਹੋਇਆ ਸਾਰੇ ਤਾਂ ਹੀ ਹੋ ਗਿਆ ਬਚਿਆ ਕੌਣ ਜਿਹੜੇ ਡੋਨੇਸ਼ਨਾਂ ਮੰਗਦੇ ਨੇ ਸੋਸਾਇਟੀਆਂ ਬਣਾ ਕੇ ਇਹਨਾਂ ਤੇ ਨਹੀਂ ਹੋਇਆ ਬਚਿਆ ਕੌਣ ਸਾਰਿਆਂ ਦਾ ਹੀ ਹੋ ਗਿਆ ਦੇਣ ਜੋਗਾ ਕੋਈ ਕੁਝ ਨਹੀਂ ਹਾਂਜੀ ਜਿਹੜੀਆਂ ਨੇ ਰਸੀਦਾਂ ਛਪਾ ਲੀਆਂ ਉਹ ਸਾਰੇ ਲੇਖੇ 'ਚ ਆ ਗਏ ਹਾਂ ਜੀ ਲੇਖੇ ਜਾਗੇ ਸਾਰੇ ਬਿਸ਼ਲੀਆਣਾ ਤੇ ਨਹੀਂ ਹੋਇਆ ਤੇ ਖਾਲਾਣਾ ਤੇ ਨਹੀਂ ਹੋਇਆ ਸਾਰਿਆਂ ਤੇ ਹੋ ਗਿਆ ਬੰਨੇ ਕੋਈ ਨਾਮ ਨਹੀਂ ਸੁਣੇ ਕੋਈ ਨਾ ਸੁਣੇ ਉਹਦੀ ਮਰਜ਼ੀ ਮੌਜ ਹੈ ਜਾ ਕੇ ਲੇਖਾ ਆਪੇ ਦੇਣਗੇ ਹਾਂਜੀ ਪਿਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਠੇਖੀ ਹਾਥ ਨਾ ਲੱਧਿਆ ਸਭ ਬੰਦੀ ਜਮਕਾਲ ਉਹ ਪਿਖਿਆ ਜੇ ਮੰਗਣੀ ਹੈ ਮੰਗ ਲੋ ਨਾਮ ਦੀ ਪਿਖਿਆ ਮੰਗੋ ਸੰਤੋਖ ਦੀ ਪਿਖਿਆ ਮੰਗੋ ਆਹ ਕਾਨੂੰਨ ਸੰਤੋਖ ਦੇ ਨਾਮ ਦੇ ਇਹ ਤਾਂ ਗੱਲ ਬਣਦੀ ਹੈ ਉਹ ਪਰਮੇਸ਼ਰ ਤੋਂ ਮੰਗੋ ਨਾਮ ਦੀ ਰਾਤ ਮੰਗੋ ਪਿਖਿਆ ਮੰਗੋ ਸੰਤੋਖ ਦੀ ਧੱਖਿਆ ਮੰਗੋ ਸੰਤੋਖ ਨੂੰ ਮੜੀ ਲਿਖਿਆ ਜੀ ਸੰਤੋਖ ਮੜੀ ਸੰਤੋਖ ਦੇ ਧਾਇਰੇ ਚ ਬੰਦ ਜਿਹੜਾ ਹੁਣ ਮੜੀ ਅਸਲੀ ਨੂੰ ਕਹਿੰਦੇ ਨੇ ਇਹ ਚ ਆਤਮਾ ਬੰਦ ਹੈ ਸੰਤੋਖ ਮੜੀ ਹੈ ਸੰਤੋਖ ਦਾ ਹੀ ਸਰੀਰ ਹੈ ਸੱਤ 60 ਸੱਤ ਸੰਤੋਖ ਸਰੀਰਾ ਸਰੀਰ ਮੜੀ ਹੁੰਦੀ ਹੈ ਸੱਤ ਸੰਤੋਖ ਦਾ ਸਰੀਰ ਬਣਾਓ ਫਿਰ ਮੰਗੋ ਨਾਮ ਹਾਂਜੀ ਸਦਾ ਸੱਚ ਹੈ ਨਾਲ ਆ ਸੱਚ ਤਾਂ ਸਦਾ ਹੀ ਨਾਲ ਹੈ ਤੁਹਾਡੇ ਸੱਚ ਕਿੱڑا ਦੂਰ ਹੈ ਤੋਂ ਸਦੋਖ ਨਹੀਂ ਹੈ ਤੁਹਾਡੇ ਕੋ ਸੱਚ ਦਾ ਨਾਲ ਹੈ ਸੱਤ ਸੰਤੋਖ ਦੀ ਮਢੀ ਬਣਾਓ ਸੱਤ ਸਦੋਖ ਦਾ ਸਰੀਰ ਬਣਾਓ ਫਿਰ ਨਾ ਮੰਗੋ ਸੱਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸੱਦ ਵਾਲੇ ਪਾਸ ਉਹ ਤਾਂ ਸੁਣ ਸੁਣਦੀ ਦਰਗਾਹ ਜੋ ਅਰਦਾਸ ਹੈ ਜਿਹੜੀ ਸੱਤ ਸੰਤੋਖ ਦੇ ਦਾਇਰੇ ਚ ਸੱਤ ਸੰਤੋਖ ਦੀ ਮਢੀ ਵਿੱਚ ਬਹਿ ਕੇ ਕੀਤੀ ਹੋਵੇ ਸੱਜ ਤੋਂ ਦੋਗ ਦੇ ਦੈਰੇ ਚ ਰਹਿ ਕੇ ਕੀਤੀ ਹੋਈ ਅਰਦਾਸ ਉਹ ਹੀ ਸੁਣੀ ਜਾਂਦੀ ਹੈ ਦਰਗਾਹ ਜੇ ਨਹੀਂ ਸੁਣੀ ਹੋਈ ਦੀ ਜਾਂਦੀ ਸੱਜ ਤੋਂ ਦੋਖ ਹੋ ਗਏ ਅਰਦਾਸ ਤਾਂ ਸੁਣ ਸੱਜ ਬਹਾਲੇ ਪਾਸ ਸੁਣਦਾ ਕਰਕੇ ਕੁਝ ਨਹੀਂ ਹੱਥ ਲੱਗਦਾ ਲੱਭਿਆ ਕਿਸੇ ਨੂੰ ਕਿਸੇ ਨੂੰ ਕੁਝ ਨਹੀਂ ਮਿਲਿਆ ਭੇਖ ਬਣਾ ਕੇ ਖਾਲੀ ਸਭ ਬੱਧੀ ਜਮਕਾਲ ਸਾਰੇ ਪੇਖਿਆਂ ਨੂੰ ਜਮਕਾਲ ਨੇ ਗੱਲ 'ਚ ਫਸੀ ਪਾਈ ਬੱਦੇ ਬੇਦ ਹੱਥ ਪੈਰਾਂ ਤੋਂ ਬੰਨੇ ਇਹਦੇ ਜਮਰਜੀ ਘੜੀਦਕੇ ਜਿੱਧਰੋਂ ਮਰਜੀ ਲਾ ਜਵੇ 15 'ਚ ਬੰਨੇ ਹੋਏ ਨੇ ਸਾਰੇ ਪੇਖੀ ਕਿਤੇ ਭਲੇਕੇ ਜ ਰਹਿਣ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸਮਾਲ ਗੁਰੂ ਜੀ ਗੱਲਾਂ ਝੂਠੀਆਂ ਨੇ ਜਿੰਨੀਆਂ ਸਾਖੀਆਂ ਤੁਸੀਂ ਸੁਣਾਉਨੇ ਹੋ ਸੱਚਾ ਨਾਮ ਉਹ ਇਕੱਠਾ ਕਰੋ ਉਹ ਤਤ ਗਿਆਨ ਇਕੱਠਾ ਕਰ ਲੋ ਤਤ ਗਿਆਨ ਲੈ ਲੋ ਜੇ ਕਿਤੋਂ ਮਿਲਦਾ ਬਾਕੀ ਸਭ ਸਾਖੀਆਂ ਕਹਾਣੀਆਂ ਸਭ ਝੂਠੀਆਂ ਨੇ ਕੋਈ ਕਹਿੰਦਾ ਮੈਨੂੰ ਕਿਸੇ ਦੇ ਦਰਸ਼ਨ ਹੋਏ ਨੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਕਿਉਂ ਝੂਠ ਬੋਲਦੇ ਹੋ ਕੀ ਲੱਭਣਾ ਝੂਠ ਚੋਂ ਇਹ ਚੋਂ ਕੀ ਦਰਸ਼ਨ ਹੋਏ ਨੇ ਕਿਹਨੂੰ ਹੋਏ ਨੇ ਇਹ ਝੂਠ ਚੋਂ ਕੁਝ ਨਹੀਂ ਜੇ ਮਿਲਣਾ ਨਾਮ ਦੀ ਜੇ ਕਿਤੋਂ ਦਾਤ ਮਿਲਦੀ ਹੈ ਜੇ ਗੁਰਬਾਣੀ ਦੀ ਸੋਚੀ ਭਰਦੀ ਹੈ ਉਹ ਲੈ ਲੋ ਨਾਲ ਕੁਝ ਭਲਾ ਹੋ ਹਾਂਜੀ ਮਹੱਲਾ ਤੀਜਾ ਜਿੱਤਦਰ ਲੇਖਾ ਮੰਗੀ ਐ ਸੋਦਰ ਸੇਵਿਓ ਨਾ ਕੋਈ ਐਸਾ ਸਤਗੁਰ ਲੋੜ ਲਹੋ ਜਿਸ ਜੇਵੜ ਅਵਰ ਨਾ ਕੋਈ ਜਿਹੜੇ ਦਵਾਰੇ ਤੇ ਲੇਖਾ ਕੋ ਗਿਆ ਜਾਂਦਾ ਸੋਦਰ ਸੇਵਿਓ ਨਾ ਕੋਈ ਉਹਦਾ ਰੂ ਨਾ ਕੋਈ ਸੇਵਿਓ ਉਹ ਲੇਖਾ ਛੱਡ ਦੋ ਲੇਖਾ ਛਾੜ ਲੇਖਾ ਪੁੱਤ-ਬਾਪ ਵਾਲੇ ਰਾਹ ਨਾ ਜਾਇਓ ਉਥੇ ਲਿਖਿਆ ਪਾਪ ਪੁੱਤ ਹਮਰੇ ਬਸ ਨਾਹੀ ਉਹ ਸੁਰਗ ਨਰਕ ਰਸਤਾ ਹੈ ਉਹ ਰਸਤੇ ਨਹੀਂ ਜਾਣਾ ਉਹ ਰਸਤੇ ਦੀ ਭਗਤੀ ਨਹੀਂ ਰਸਤੇ ਵਾਲੀ ਸੇਵਾ ਨਹੀਂ ਕਰਦੀ ਸੇਵਯੋ ਨਾ ਕੋਏ ਹਾਂਜੀ ਐਸਾ ਸਤਿਗੁਰ ਲੋੜ ਲਹੋ ਜਿਸ ਜੀਵੜ ਅਵਰ ਨਾ ਕੋਏ ਐਸਾ ਸਤਿਗੁਰ ਲੱਭ ਲੋੜ ਪੈਦਾ ਕਰੋ ਇਸ ਜੇ ਵੱਡਾ ਵੱਲ ਨਾ ਕੋਈ ਜਿਹਦੇ ਜਿੱਦਾ ਵੱਡਾ ਹੋਰ ਕੋਈ ਨਾ ਹੋਵੇ ਉਹ ਸਤਗੁਰ ਕੌਣ ਹੈ ਸਤਗੁਰ ਪਿਆਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਨਾਸ਼ੀ ਪ੍ਰਖੈ ਸਭ ਮਹਿਰਿਆ ਸਮਾਏ ਜਾਂ ਫਿਰ ਕੁਰਬਾਨੀ ਦਾ ਗਿਆਨ ਉਹ ਸਤਗੁਰ ਹੈ ਸੱਚ ਦਾ ਗਿਆਨ ਉਹਨੂੰ ਖੋਜ ਲੋ ਕੁਰਬਾਨੀ ਚੋਂ ਓਡਾ ਵੱਡਾ ਹੋਰ ਕੋਈ ਗਿਆਨ ਦੀ ਇਹਦੇ ਨਾਲ ਭਲਾ ਹੋ ਸਕਦਾ ਪਰ ਭਲਾ ਨਹੀਂ ਹੂੜ ਬਾਲਾ ਕਿਸੇ ਹੋਰ ਗੰਨ ਨਾਲ ਹਾਂਜੀ ਤੇ ਇਸ ਸ਼ਰਨ ਆਈ ਛੁੱਟੀ ਐ ਲੇਖਾ ਮੰਗੇ ਨਾ ਕੋਈ ਸੱਚ ਦ੍ਰਿੜਾਏ ਸੱਚ ਦ੍ਰਿੜ ਸੱਚਾ ਉਹ ਸ਼ਬਦ ਦੇ ਸਤਿਗੁਰ ਦੀ ਸ਼ਰਨ ਵਿੱਚ ਚਲੇ ਜਾਓ ਸਤਿਗੁਰ ਦੀ ਸੇਵਾ ਲੱਗ ਜਾਓ ਸਤਿਗੁਰ ਕੀ ਸੇਵਾ ਸਫਲਾਏ ਜੇ ਕੋ ਕਰੇ ਸੱਚ ਦਿਰੜਾਏ ਤੈਨੂੰ ਸੱਚ ਦਿਰੜ ਕਰਾਊਗਾ ਸਤਗੁਰ ਸੱਚ ਦਿਰੜ ਸੱਚ ਦਿਰੜ ਕਰ ਲਈ ਉਥੇ ਸੱਚਾ ਉਹ ਸ਼ਬਦ ਦੇ ਸ਼ਬਦ ਦੇ ਸੱਚ ਦਾ ਇਹ ਸ਼ਬਦ ਉਪਦੇਸ਼ ਦਿੰਦਾ ਉਹ ਸੱਚ ਦਾ ਉਪਦੇਸ਼ ਦਿੰਦਾ ਸੱਚ ਦਿਰੜ ਕਰਾ ਦਿੰਦਾ ਝੂਠ ਛਡਾ ਦਿੰਦਾ ਝੂਠੀ ਮਾਇਆ ਛਡਾ ਦਿੰਦਾ ਝੂਠੀ ਮਾਇਆ ਹੀ ਬੰਧਨ ਨੇ ਝੂਠੀ ਮਾਇਆ ਕਰਕੇ ਹੀ ਹੈ ਹੋਰ ਕੁਛ ਨਹੀਂ ਹੈ ਝੂਠੀ ਮਾਇਆ ਕਰਕੇ ਆਉਣ ਜਾਣ ਜੋਠੇ ਆਇਆ ਵਾਲਿਆਂ ਦਾ ਹੀ ਸੁਰਗ ਨਰਕ ਹੈ। ਛਕਿਆਰਿਆਂ ਵਾਸਤੇ ਕੋਈ ਸੁਰਗ ਨਰਕ ਨਹੀਂ ਜਿਸ ਦੇ ਸੱਚ ਹੈ ਤਨ ਦੇ। ਹਿਰਦੇ ਵਿੱਚ ਸੱਚ ਪ੍ਰਗਟ ਹੈ। ਤਨ ਮਨ ਵੀ ਸੱਚਾ ਹੋਏ। ਉਹਦਾ ਤਨ ਮਨ ਉਹਦੀ ਬੁੱਧੀ ਵੀ ਸੱਚੀ ਉਹਦਾ ਮਨ ਵੀ ਸੱਚਾ ਉਹਦਾ ਲੋਕੋ ਸੱਚਾ ਨਾ ਕੋ ਸੱਚਾ ਹੁਕਮ ਦੀਏ ਸੱਚ ਦੇ ਹੁਕਮ ਤੋਂ ਸੱਚ ਦੇ ਹੁਕਮ ਤੋਂ ਬਲੀਏ ਜੇ ਇਹ ਭਾਵੇਂ ਵਿੱਚ ਚੱਲੀਏ ਸੱਚੀ ਵਡਿਆਈ ਦੇ ਤਾਂ ਸੱਚ ਦੀ ਵਡਿਆਈ ਐਸੀ ਵਡਿਆਈ ਮਿਲਦੀ ਹੈ ਆ ਸੱਚੀ ਵਡਿਆਈ ਕੀ ਹੈ ਗੁਰਬਾਣੀ ਇਹ ਮਿਲਦੀ ਹੈ ਫਿਰ ਉਤੋਂ ਗੁਰਬਾਣੀ ਰਚਣ ਦੀ ਸ਼ਕਤੀ ਗੁਰਬਾਣੀ ਰਚਣ ਦੀ ਕਲਾ ਉਤੋਂ ਮਿਲਦੀ ਹੈ ਹਾਂਜੀ ਨਾਨਕ ਸੱਚਾ ਹੁਕਮ ਮੰਨਿਐ ਸੱਚੀ ਵਡਿਆਈ ਦੇ ਸੱਚੇ ਮਾਹੇ ਸਮਾਵਸੀ ਜਿਸ ਨੂੰ ਨਜ਼ਰ ਕਰੇ ਫਸੇ ਜਾਂ ਸੱਚੀ ਵਡਿਆਈ ਮਿਲ ਜਾਂਦੀ ਹੈ ਤੇ ਸੱਚੇ ਮਾਹੇ ਸਮਾਵਸੀ ਸੱਚੇ ਵਿੱਚ ਸਮਾ ਜਾਂਦਾ ਉਹ ਜਿਸ ਨਜ਼ਰ ਕਰੇ ਜਿਹਦੇ ਤੇ ਕਿਰਪਾ ਹੋ ਜਾਂਦੀ ਹੈ ਉਹੀ ਵਡਿਆਈ ਕਰ ਸਕਦਾ ਹੈ ਸੱਚੇ ਵਿੱਚ ਸਮਾ ਜਾਂਦਾ ਹੈ ਹੋਜੀ ਪੌੜੀ ਇਹ ਨਾ ਆਖੀਆਂ ਅਹੰਕਾਰ ਮਰੈ ਦੁਖ ਪਾਵੈ ਅੰਦੇ ਆਪ ਨਾ ਪਛਾਨਨੀ ਦੂਜੇ ਪੱਚ ਜਾਵੈ ਸੂਰੇ ਇਹ ਆਖੀ ਆਖੀਐ ਅੰਕਾਰੀ ਮਰੈ ਦੁਖ ਪਾਵੈ ਸੂਰਮੇ ਨਹੀਂ ਹੁੰਦੇ ਕਹੇ ਜਾ ਸਕਦੇ ਜਿਨ੍ਹਾਂ ਦੇ ਅੰਦਰ ਹੰਕਾਰ ਹੁੰਦਾ ਅੰਕਾਰੀ ਹੁੰਦੇ ਨੇ ਜਿਹੜੇ ਧੰਕਾਰ ਚ ਮਰ ਜਾਂਦੇ ਨੇ ਔਰ ਦੁਖ ਪਾਉਂਦੇ ਨੇ ਧੰਕਾਰ ਕਰਕੇ ਅੰਦੇ ਆਪ ਨਾ ਪਛਾਨੜੀ ਜਿਹਨਾਂ ਨੇ ਆਪਣਾ ਆਪ ਨਹੀਂ ਪਛਾਨਿਆ ਉਹ ਅੰਦੇ ਨੇ ਦੂਜੇ ਪਛ ਜਾਵਾਂ ਦੂਜੀ ਮਾਇਆ ਦੇ ਕਰ ਪਛੇ ਨੇ ਬੁੱਧੀ ਬਹੁਤ ਛੋਟੀ ਰਹਿ ਦੀ ਗਿਆਨ ਬਹੁਤ ਸੀਮਤ ਹੋ ਜਾਂਦਾ ਉਹਨਾਂ ਦਾ ਛੋਟੀ ਸੋਚ ਹੋ ਜਾਂਦੀ ਹੈ ਵਾਜੀ ਅਤਕ ਰੋਧ ਸਿਉ ਲੁੱਜਦੇ ਅੱਗੇ ਪਿੱਛੇ ਦੁੱਖ ਪਾਵੈ ਹਰ ਜਿਉ ਅਹੰਕਾਰ ਨਾ ਪਾਵਈ ਵੇਦ ਕੂਕ ਸੁਣਾਵੈ ਉਸਾਂ ਨੇ ਕਰੋਧੀ ਹੁੰਦੇ ਨੇ ਆਦਿਕਲ ਸਾਡੇ ਜਿਹੜੇ ਨੇ ਨਾ ਅਯੁਰ ਨੇ ਆਪਣੇ ਆਪ ਨੂੰ ਗਰਮ ਦੇ ਲਈ ਸਮਝਦੇ ਨੇ ਦੇ ਖਤਰਾ ਲਿਖਿਆ ਹੋਇਆ ਗੁਰਬਾਣੀ ਕੀ ਕਹਿੰਦੀ ਹੈ ਉਹਨਾਂ ਨੂੰ ਕਰੋਧ ਉਹਨਾਂ ਨੂੰ ਅੱਗੇ ਪਿੱਛੇ ਦੁੱਖ ਅੱਗੇ আর ਪਿੱਛੇ ਦੁਖੀ ਹੋ ਰਹਿੰਦੇ ਨੇ ਉਹ ਦੁੱਖੇ ਪਾਉਂਦੇ ਨੇ ਹਰ ਜੀਉ ਹਮ ਨਾ ਪਾਵੀ ਹਰ ਜੀਉ ਨੂੰ ਕਾਲ ਨਹੀਂ ਜਾਂਦਾ ਲੱਗਦਾ ਬੇਦਕੂ ਕੁ ਸੁਣਾਵੇ ਬੇਦ ਵੀ ਇਹੀ ਉੱਚੀ ਉੱਚੀ ਪੁਕਾਰਦੇ ਨੇ ਜਿਹੜੇ ਵੇਦ ਨੇ ਇਹਨਾਂ ਨੇ ਵੀ ਇਹੀ ਕਿਹਾ ਹੈ ਜਿਹੜੇ ਵੇਦ ਤੇ ਗਿਆਨੀ ਨੇ ਗਿਆਤਾ ਨੇ ਉਹਨਾਂ ਨੇ ਵੀ ਇਹੀ ਕਿਹਾ ਹੈ ਗੁਰਮਖਾਣੇ ਵੀ ਇਹੀ ਕਿਹਾ ਹਾਂਜੀ ਅਹੰਕਾਰੀ ਮੂਏ ਸੇ ਵਿਗਤੀ ਗਏ ਮਰ ਜਨਮੇ ਜਿਹੜੇ ਅਹੰਕਾਰੀ ਮਰ ਜਾਂਦੇ ਨੇ ਉਹ ਦੁਰਗਤੀ ਦੇ ਵਿੱਚ ਚਲੇ ਗਏ ਬਨਾਂ ਦੀ ਗਤੀ ਨਹੀਂ ਹੋਈ ਉਹ ਨਹੀਂ ਆਦੀ ਅੱਗੇ ਵਧੀ ਉਹ ਤਾਂ ਸਮਾਂ ਪੱਛਮ ਹੋਵੇ ਉਹਨੂੰ ਬੁਗਾ ਕੇ ਚਲੇ ਜਾਂਦੇ ਨੇ ਇੱਥੇ ਬੈਸਦੇ ਮਰ ਜਾਂਦੇ ਨੇ ਜਨਮ ਦੇ ਨੇ ਫੇਰ ਆਉਂਦੇ ਨੇ ਉਹ ਤਾਂ ਉਸੇ ਚ ਪਏ ਰਹੇ ਜੰਮਣਵਾਲ ਦਾ ਚੱਕਰ ਨਹੀਂ ਛੱਡ ਸਕਦਾ ਉਹਨਾਂ ਦਾ ਜੰਮਣਵਾਲ ਦੇ ਚੱਕਰ 'ਚ ਪਏ ਰਹਿੰਦੇ ਨੇ ਠੀਕ ਹੈ ਜੀ ਇੱਥੇ ਨੌਵੀਂ ਪੜ੍ਹਦੀ ਸਮਾਪਤੀ ਹੈ ਜੀ